सुख देओ परीक्षित गुण रवै गौतम रिखी जस गायो कवि कल सुजस नानक गुरु नित नवतन जग छायो हां जी जेड़ा परीक्षित हां जी इनादे भी परीक्षित होया है राजा हां जी समझानी ਪ੍ਰੀਖਿਤ ਰਾਜਾ ਹੋਇਆ ਇਹਨਾਂ ਦੇ ਪੜਨਾਂ ਦੇ ਵਿੱਚੋਂ ਚਲ ਇਹ ਆਪਣਾ ਪ੍ਰੀਖਿਤ ਜਿਹੜਾ ਹੋਇਆ ਇਹ ਬ੍ਰਹਮ ਗਿਆਨੀ ਹੋਇਆ ਉਹਨਾਂ ਨੇ ਪ੍ਰੀਖਿਤ ਨੂੰ ਬ੍ਰਹਮ ਗਿਆਨੀ ਕੀਤਾ ਅੱਛਾ ਜੀ ਉਹਨਾਂ ਨੇ 18 ਪੜਤ ਮਤਲਬ ਮਾਰੇ ਕਹਿ ਨੇ ਇਹ ਕਹਿੰਦੇ ਨੇ ਪ੍ਰੀਖਿਤ ਜਿਹੜਾ ਸੀਗਾ ਰਾਜਾ ਆਪਣਾ ਪ੍ਰੀਖਿਤ ਰੂਪ ਜੀ ਜੀ ਅੱਛਾ ਜੀ ਰਾਜਾਤਾਂ ਦੀ ਲਿਖਿਆ ਪ੍ਰਿਸ਼ਿਤ ਲਿਖਿਆ ਹੈ ਹਾਂਜੀ ਪ੍ਰਿਸ਼ਿਤ ਇਹਦੇ ਤਾਂ ਪ੍ਰਿਸ਼ਿਤ ਲਿਖਿਆ ਨੇ ਸਾਡੇ ਕੋਈ ਜਿਹੜਾ ਪ੍ਰਿਸ਼ਿਤ ਜੀ ਹਾਂਜੀ ਜਿਹਨੂੰ ਜਨਮ ਜਿਹਨੂੰ ਜਨਮ ਤੋਂ ਪਹਿਲਾਂ ਕੋਈ ਨੁਕਸਾਨ ਹੋ ਚੁੱਕਿਆ ਹੋਵੇ अच्छा जी प्री क्षती ठीक है जी। हो हो प्री क्षती हो चुकी होगी जन्म ਤੋਂ ਪਹਿਲਾਂ ਪ੍ਰੀ। اچھا ਜੀ। ਆ ਜਨਮ ਤੋਂ ਪਹਿਲਾਂ ਮਨੁੱਖਾ ਜਨਮ ਸੀ। ਉਹ ਪੂਰੀ ਕਰਦਾ ਫਿਰਦਾ ਇਹ ਪ੍ਰੀਖਸ਼ਤੀ ਸਾਰੇ ਇੱਥੇ ਜਿੰਨੇ ਹਰ ਕਿਸੇ ਨੂੰ ਪ੍ਰੀਖਤ ਕਿਹਾ ਜਾ ਸਕਦਾ ਉਹ ਖਸਤੀ ਦੀ ਨੁਕਸਾਨ ਦੀ ਪੂਰਤੀ ਵਾਸਤੇ ਅਸੀਂ ਆਏ ਹਾਂ ਸਾਰੇ ਇੱਥੇ ਠੀਕ ਦਾ ਬਲ ਘਟ ਗਿਆ ਨਾ ਹੋਵੇ ਬੁੱਧੀ ਦਾ ਬਲ ਪਤਾਉਣ ਵਾਸਤੇ ਆਏ ਹੋਏ ਹਾਂ ਉਤ ਆਈ ਹੋਰ ਪਰਦੇਸਨ ਦੂਰ ਬੁੱਧ ਬਲ ਹੀਨ ਮੋਏ ਪਰਦੇਸਨ ਦੂਰ ਤੇ ਆਈ ਉਹ ਕਿੰਨੀਆਂ ਜੁਰਮ ਚੱਲ ਗਿਆ ਹੂੰ ਹੂੰ ਲੱਖ ਜੁਰਮ ਭੁਗਤ ਕੇ ਆਏ ਹਾਂ ਇਹ ਅਜੇ ਉਹਨੇ ਵਿਜੁਤ ਪੂਰੀ ਹੋਈ ਹੈ। ਹੂੰ ਹੂੰ। ਨਹੀਂ ਪਹਿਲਾਂ ਹੋਈ ਸੀ। ਹੂੰ ਹੂੰ। ਸੁਖ ਦੇਵ ਜੀ। ਹਾਂ ਵੀ ਇਹਨਾਂ ਦਾ ਹੈਗਾ ਇੱਕ। ਦੀ ਇਹਨਾਂ ਨੇ ਕਹਾਣੀ ਹੋਰ ਬਣਾਈ ਹੋਈ ਹੈ। ਹੂੰ ਹੂੰ। ਸੁਖ ਕਹਿੰਦੇ ਨੇ ਤੋਤੇ ਰੂ ਇਹਨਾਂ ਨੇ ਇੱਕ ਕਰ ਲਿਆ। ਉਹ ਤਾਂ ਆਦਮੀ ਬਣਿਆ ਹੋਇਆ ਹੂੰ ਹੂੰ ਉਹਨੂੰ ਸੁਖਦੇਵ ਉਹਦਾ ਨਾਮ ਐ ਬਾਦ ਦੇ ਵਿੱਚ ਪੈ ਗਿਆ ਸੁਖਦੇਵ ਕੱਕੇ ਨਾਲ ਐ ਸੁਖਦੇਵ ਅੱਛਾ ਜਿਹੜੀ ਐ ਤੋਤਾ ਸੂਰਟਾ ਪਰ ਅਬ ਵੀ ਮਤਲਬ ਇਹ ਹੀ ਐ ਇਹ ਸੂਟ ਐ ਤੋਤਾ ਬਹੁਤ ਔਖਾ ਪੜਦਾ ਹੁੰਦਾ ਪੜਾਉਣਾ ਜਿਹੜਾ ਬਾਰ-ਬਾਰ ਉਹੀ ਗੱਲ ਤੋਂ ਪੜਾਉਂਦੀ ਹੈ ਬਹੁਤ ਔਖੀ ਹੈ। ਹੂੰ ਹੂੰ। ਕੋਈ ਗੱਲ ਵਾਰ-ਵਾਰ ਪੜਾਉਂਦੀ ਹੈ। ਉਹ ਤੇ ਕੋਈ ਗੱਲ ਪੜਾਈ ਤੇ ਹੁੰਦੀ ਹੈ। ਹੂੰ ਜਿਹੜੀ ਬੁੱਧੀ ਪਹਿਲਾਂ ਸੀ ਨਾ ਦੁਰਮਤ ਕਪੁੱਧ ਸੀ ਐਂ ਕਹਿ ਲੋ। ਜਦੋਂ ਇਹਨੇ ਗੁਰਕਾ ਸ਼ਬਦ ਲਿਆ ਗੁਰਪਾਣੀ ਆਪ ਸਭ ਫਿਰ ਮੰਨੂ ਪੜਾਉਣ ਲੱਗੀ ਪੜਾਉਂਦੀ ਨਹੀਂ ਪੜੌਦੀ ਆਪ ਵੀ ਪੜ ਗਈ ਆਪ ਵੀ ਕਰ ਗਈ। ਇਹ ਪਹਿਲਾਂ ਉਹ ਜਿਹੜੀਆਂ ਉਹਨਾਂ ਨੇ ਕਹਾਣੀਆਂ ਬਣਾਈ ਹੋਈ ਉਹਦੇ ਉਹ ਕਹਾਣੀਆਂ ਰੱਦ ਕਰਕੇ ਉਸਦੀ ਗੱਲ ਦੱਸੀ ਹੋਈ ਸ਼ਹਾ ਗੁਰਬਾਣੀ ਸ਼ਿਵ ਜੀ ਪਾਰਵਤੀ ਕਹਿੰਦੀ ਮੈਨੂੰ ਉਹ ਕਥਾ ਸੁਣਾ ਅਬਰ ਕਥਾ ਅੱਛਾ ਅੱਛਾ ਠੀਕ ਹੈ ਜੀ ਹਾਂ ਉਹ ਸੁਣੀ ਹੋਈ ਹਾਂ ਉਹ ਕਹਿੰਦਾ ਕੋਈ ਹੋਰ ਸੁਣ ਲੂਗਾ ਇਹ ਕਥਾ ਸੁਣਾਈ ਦੀ ਨਹੀਂ ਹੁੰਦੀ ਪਹਿਲਾਂ ਇਹ ਦੱਸੋ ਕਈ ਅਵਰ ਕਥਾ ਕਿਸੇ ਨੂੰ ਨਹੀਂ ਸੁਣਾਈਦੀ ਹੁੰਦੀ। ਕਥਾ ਨਹੀਂ ਸੁਣਾਉਣੀ, ਅਵਲ ਨਹੀਂ ਕਰਨਾ, ਉਹ ਧਾਰਮਿਕ ਆਦਮੀ ਸਕਦਾ। ਵੀ ਦੀ ਹੈ, ਮੈਂ ਕਿਸੇ ਨੂੰ ਦੇਣੀ ਨਹੀਂ। ਉਹ ਬੰਦਾ ਦਾ ਬਹੁਤ ਹੀ ਗੁਰੂ ਦਾ ਧਾਰਮਿਕ ਬੰਦਾ ਹੀ ਨਹੀਂ ਕਹਾ, ਉਹਦੇ ਵਿੱਚ ਤਾਂ ਦਇਆ ਹੈ ਹੀ ਨਹੀਂ। ਦਇਆ ਉਹਥੇ ਕਿੱਥੇ ਹੈ? ਦਇਆ ਤਾਂ ਸੁਪਨਾ ਹੀ ਨਹੀਂ ਆਉਂਦਾ ਕੋਈ। ਗੁਰਬਾਨੀ ਵਰਗਾ ਥਾਈ ਹੈ ਅਸਲ ਠੀਕ ਹੈ ਗੁਰਬਾਨੀ ਦੀ ਕਥਾ ਉਹ ਕਹਣਾ ਮੈਂ ਸੁਣੋੜੀ ਕਿਸੇ ਨੂੰ ਨਹੀਂ ਚਲੋ ਕਹਿੰਦੇ ਉਹ ਲੋਕੇ ਚਲੇ ਗਏ ਅਮਰਨਾਥ ਦੇ ਮੰਦਰ ਚ ਗੁਫਾ ਦੇ ਵਿੱਚ ਬਹਿ ਗਏ ਅੱਛਾ ਜੀ ਵੀ ਇੱਥੇ ਲੋਕੇ ਸੁਣਾਉਣਾ ਤੈਨੂੰ ਹੋਰ ਨਾ ਕੋਈ ਸੁਣ ਰਵੇ ਸੁਣੋ ਇਹਨਾਂ ਦੀਆਂ ਕਹਾਣੀਆਂ ਹਾਂ ਜੀ ਗਿਆ ਸ라이 ਗਿਆ ਕਹਿੰਦਾ ਤੋਤਾ ਬੈਠਾ ਸੀਗਾ ਕੋਈ ਵੀ ਸੁਣਦਾ ਸੀਗਾ ਗੁਫਾ ਦੇ ਵਿੱਚ ਕੋਈ ਅੱਛਾ ਜੀ ਉਹ ਤਾਂ ਗਿਆ ਸ਼ਿਵ ਜੀ ਨੇ ਕਹਤੇ ਜੀ ਖੁੱਲਹੀ ਉਹਨੇ ਦੇਖਿਆ ਸੁੱਤੀ ਪਈਆਂ ਹਸਾਰਾ ਕੋਲ ਬਸ ਦੇਖਿਆ ਤੋਤਾ ਉਹ ਕਹਿੰਦਾ ਵੀ ਤੈ ਮੇਰੀ ਕਥਾ ਛੱਡਿਓ ਚੋਰੀ ਕਰਵੇਂ ਤੈਨੂੰ ਮਾਰੂਗਾ ਪਹਿਲਾਂ ਤੁਹਾਨੂੰ ਆ ਪੁੱਛੇ ਵੀ ਭੱਲੇਆ ਲੋਕਾ ਇਹਨੂੰ ਤਾਂ ਫਿਰ ਕਥਾ ਸੁਣਾਤੀ ਆ ਮੈਂ ਕਰਦਾ ਤੂੰ ਉਹਨਾਂ ਨੂੰ ਮਾਰ ਦੇਤਾ ਨਾਲੇ ਉਹਦੇ 'ਚ ਕਿੰਨੀ ਕਿ ਬੁੱਧੀ ਐ। ਹੋਰ ਪਾਉ ਨੂੰ ਗਾਣੇ ਕਰ ਦੂਗਾ। ਹਾਂਜੀ। ਇਹੋ ਜੀਆਂ ਗੱਲਾਂ ਇਹਨਾਂ ਨੇ ਪਾ ਕੇ ਉਂਟ ਪਟਾਂਗ ਤੇ ਬਰਬਜਾਨ ਨੂੰ ਇਹ ਗੱਲਾਂ ਨੇ ਇਹੋ ਜੀਆਂ ਦਾ ਸੁਧਾਰ ਕੀਤਾ। ਸਿਮਰਤ ਵੇਦ ਪੁਰਾਣ ਪੋਤੀਆਂ ਨਾਂ ਬਣਾ ਕੇ ਸਭ ਕੂੜ ਗੱਲਾਂ ਸੀ। ਉੱਚੀਆਂ ਗੱਲਾਂ ਸੀ। ਆਪਕੇ ਰਖਤਿਆਂ ਪਰਮ ਉਹ ਸੁਖਦੇਵ ਸੁਖਦੇਵ ਅਸਲ ਚ ਫਿਰਮ ਗਿਆਦੀ ਹੋਇਆ ਹੈ ਅੱਛਾ ਜੀ ਸਾਵਦੇ ਨਾ ਨੇ ਸੱਲਾਂ ਦੇ ਵੀ ਉਹ ਵੀ ਸ਼ਿਵਜੀ ਦਾ ਚਿੱਲ ਫੇਰ ਅਗੋ ਤੋਤਾ ਉੜਿਆ ਗੰਗਾ ਸ਼ਿਵਜੀ ਪਛ ਲਿਆ ਕੋਈ ਤੇ ਕੋਈ ਔਰਤ ਖੜੀ ਸੀ ਉਹਦੇ ਮੂੰਹ ਉਹਨੂੰ ਮੂੰਹ ਟਿਆ ਵਾਸੀ ਲੈਣ ਲੱਗੀ ਮੂੰਹ ਚ ਵੜ ਗਿਆ ਮੂੰਹ ਚ ਵੜ ਗਿਆ ਗਰਭ ਚ ਗਿਆ ਉੱਥੇ ਪੜਨ ਲੱਗ ਗਿਆ ਉਹ ਪੁੱਛਿਆ ਵੀ ਮੂੰਹ ਚ ਗਿਆ ਤਾਂ ਬੇਦਾ ਚਾਊਗਾ ਹੂੰ ਚ ਕੰਮ ਚ ਗਿਆ ਮੋਜ ਗਿਆ ਬਿੱਤਾ ਜਾਂਦਾ ਤੇ ਹজম ਹੋ ਜਾਂਦਾ ਫਸਲ ਹੋ ਜਾਂਦਾ ਗਰਭ ਦੇ ਵਿੱਚ ਕਿਵੇਂ ਚਲਾ ਗਿਆ ਕਿਸੇ ਨੇ ਕੋਈ ਸਵਾਲ ਕੀਤਾ ਹੀ ਨਹੀਂ ਹਾਂਜੀ ਇਹੋ ਜਿਹਾ ਕੋਈ ਸਾਡੇ ਪਾਸ ਉਹਨਾਂ ਦੇ ਇਤਿਹਾਸ ਦਾ ਕਿਸੇ ਨੇ ਕੋਈ ਸਵਾਲ ਕਦੇ ਕੀਤਾ ਹੀ ਨਹੀਂ ਜੇ ਸਵਾਲ ਕਰਦੀਏ ਫਿਰ ਇਹਦੇ ਕੱਖ ਦੀ ਇਤਿਹਾਸ ਦਾ ਨਾ ਕੁਦਰਤੀ ਜਿਹੜੇ 14 ਰਤਨ ਇਨਾ ਨੇ ਮੰਨੇ ਆ ਇਹਨਾਂ ਚ ਵੀ ਕਿਸੇ ਦਾ ਮਾਪਾਪ ਹੈ ਹੀ ਰਤਨ ਚਾਹੇ ਲక్ష్ਮੀ ਹੈ ਚਾਹੇ ਉਹਨਾਂ ਦਾ ਕਿਸੇ ਦਾ ਮਾਪਾਪ ਨਹੀਂ ਹਈ ਨਹੀਂ ਪੁੱਛਿਆ ਸੁਖਦੇਵ ਪਰਿਸ਼ਿਤ ਗੁਣ ਰਵੇ ਸੁਖਦੇਵ ਦੇਣ ਵਾਲਾ ਸੁੱਖ ਦਾ ਦਾਤਾ ਹਾਂਜੀ ਜਿੱਥੋਂ ਸੁਖ ਮਿਲਦਾ ਗੁਰਦੇਵ ਨੂੰ ਸੁਖ ਕਿਹਾ ਹੈ ਹਾਂ ਲਗੋਰਾ ਉਹੀ ਸੁਖਦੇਵ ਹੈ ਠੀਕ ਹੈ ਜੀ ਪ੍ਰੀਖਿਤ ਹਾਂ ਹਾਂ ਪ੍ਰੀਖਿਤ ਮਾਨਾ ਅੱਛਾ ਵੀ ਹੈ ਨਾ ਠੀਕ ਹੈ ਜੀ ਇਹ ਨਾ ਪਿੱਛੇ ਆਇਆ ਹੋਇਆ ਹਾਂ ਹਾਂ ਓਏ ਉਹੀ ਪ੍ਰੀਖਿਤ ਹੈ ਉਹੀ ਸੁਖਦੇਵ ਹੈ ਦੋਹਾਂ ਡਾਕਟਰ ਦੇ ਅੱਛਾ ਭਗਤ ਬਣ ਜਾਂਦਾ ਬੁਝ ਗਿਆ ਜੀ। ਭਾਵੇਂ ਉਹ ਪ੍ਰਿੰਟ ਕਰ ਲਓ ਭਾਈ ਸੁਬਦੇ ਕਰ ਲਓ ਉਹਨਾਂ ਨੇ ਗੁਰੂ ਜਾਇ ਨੇ ਆ ਗੁਰੂ ਜਾਇ ਨੇ ਹੋਰ ਕੋਈ ਬਾਲਾ ਨਹੀਂ ਫੇਰੀ। ਦੇ ਵਿੱਚ ਵੀ ਆ ਲਫਜ਼ ਕਹਿੰਦੇ ਦੁਆਪਰ ਚਾਹ ਕਹਿੰਦੇ ਤੇ ਤੇ ਜਾ ਕਹਿੰਦੇ ਇਹ ਜਿਹੜੀ ਗੱਲ ਬਣਾਈ ਹੋਈ ਹੈ ਰੱਦ ਕੀਤੀ ਹੋਈ ਹੈ। ਹੂੰ ਵਾਹਿਗੁਰੂ ਨਾਲ ਕਹਾਣੀ ਬਣਾਈ ਜਈ ਹੈ ਵੀ ਸਾਜੁਗ ਚ ਨਾਮ ਜਪਦੇ ਤੇ ਦੁਆਪਰ ਚ ਜਪਦੇ ਤੇ ਤੇ ਜਪਦੇ ਤੇ ਕਾਲਜੁਗ ਚ ਜਪਦੇ ਜੋ। ਉਹ ਸਾਰੀ ਰੰਗ ਦੀ ਦੇ ਰਹੇ ਨੇ ਸਾਰੇ ਗੁਣ ਗਾਇਨੇ ਕਰਦੇ ਰਹੇ ਨੇ ਆਹੀ ਵਿਧੀ ਰਹੀ ਹੈ ਜਿਹੜੀ ਹੁਣ ਹਾਂ ਕੋਈ ਵਿਧੀ ਨਹੀਂ ਕਦੇ ਬਦਲੀ ਹੋ ਵੀ ਹੈ ਕਦੇ ਵਿਧੀ ਠੀਕ ਹੈ ਵਰਮਾ ਤੋਂ ਗ੍ਰੈਂਡ ਕਰੇ ਤੇ ਬਿਨਾ ਬੁੱਧ ਬਿਬੇ ਬਣਦੀ ਹੋਈ ਨਹੀਂ ਹੈ ਬੁੱਧੀ ਤੋਂ ਬਿਨਾ ਤੇ ਛੁਟਕਾਰਾ ਹੁੰਦਾ ਹੀ ਨਹੀਂ ਹੈ ਹਮ ਗੱਲ ਆ ਹੈ ਇੱਥੇ ਸੁਖਦੇਵ ਪ੍ਰੀਛਤ ਗੁਣ ਗਾਵਾਂ ਹਮ ਗੌਤਮ ਰਿਖ ਬਹੁਤ ਪ੍ਰੀਤ ਗੋਤਮ ਹਾਂਜੀ ਹਾਂ ਅਗੇ ਕੀ ਗੋਤਮ ਨੇ ਗੌਤਮ ਰਿਖ ਜਸ ਗਾਇਓ हां गौतम جاسਸੀ ਜਿਹੜਾ ਗੋਤਮ ਨਹੀਂ ਕੀ ਹੋਇਆ ਉਹਨੇ ਵੀ ਜਿਸੇਗਾ ਸਾਰੇ ਜਸ ਗਾਉਣ ਵਾਲਿਆਂ ਦੀ ਇੱਕ ਲਿਸਟ ਹੈ ਇਹ ਅਲੱਗ ਰਹੇ ਦੇ ਕਦੇ ਕੋਲ ਨਹੀਂ ਆ ਮੁਕਤੀ ਵਾਲੇ ਹੁੰਦੇ ਤਾਲੀ ਘਾਇਰਿਆ ਮੁਕਤੀ ਦੀ ਕਥਾ ਨਹੀਂ ਸੁਣਦੀ ਕਿਸ ਨੂੰ ਅਸਲ ਦੇ ਵਿੱਚ ਸ਼ਿਵਜੀ আর ਵਿਰੋਧੀ ਰੇਸ ਕਰ ਰਹੇ ਅੱਜ ਵੀ ਵਿਰੋਧੀ ਨੇ ਗੁਰਮਾਰਗ ਦੀ ਵੀ ਸਿੱਧਾ ਨਾਲ ਜਿਹੜੀ ਚਰਚਾ ਹੋਈ ਹੈ ਉਹਦਾ ਮਤਲਬ ਇਹੀ ਹੈ ਉਹਨੂੰ ਰਾਹ ਰਾਸਤੇ ਲਿਆ ਰਹੇ ਥੇ ਅੱਛਾ ਜੀ ਤੁਸੀਂ ਆ ਪੰਡਤ ਹੈ ਰਾਜੇ ਨਾਲ ਖੜੇ ਨੇ ਇੱਧਰ ਦੇ ਨਾਲ ਖੜੇ ਨੇ ਸ਼ਾਸਤਰਾ ਨਾਲ ਖੜੇ ਨੇ ਸਿਬਰਤੀਆਂ ਵਾਲੇ ਨੇ ਬਲੂ ਰਾਜਾ ਬਨੂ ਦੇ ਸਿਬਰਤੀਆਂ ਨੇ ਇਹ ਉਹਦੇ ਨਾਲ ਖੜੇ ਨੇ ਉੱਥੋਂ ਚਲੇ ਆਉਂਦੇ ਨੇ ਉਧਰ ਸਮਾਧੀ ਵਾਲੇ ਚੱਲੇ ਹੁੰਦੇ ਨੇ ਜੋਗੀ ਹੂੰ ਹੂੰ ਇਹ ਮੁਕਤੀ ਦੋ ਵਿਰੋਧੀ ਨੇ ਇਹਨਾਂ ਆ ਛੱਡੋ ਜੇ ਤਾਰਮਕ ਕਮ ਮੁਕਤੀ ਹੋ ਆ ਭਾਈ ਤੁਸੀਂ ਸਭ ਕਰੋ ਵੀ ਤੁਹਾਡੇ ਨਾਲ ਤੁਹਾਨੂੰ ਠੀਕ ਹੈ ਮੁਕਤੀ ਦਾ ਚਲੋ ਅਸੀਂ ਇੱਧਰੋਂ ਲੈ ਲੈਂਦੇ ਠੀਕ ਭਗਤਾਂ ਨੂੰ ਬਣ ਜਾਂਦੇ ਰਹੇ ਨੇ ਮੰਨ ਕੇ ਵੀ ਕਾਬਲਾ ਆਪਣੇ ਵਾਲੇ ਕਰਦੇ ਰਹੇ ਸੀ ਹੂੰ ਹੂੰ ਠੀਕ ਹੈ ਜੀ ਸਿੱਧਾ ਨੇ ਬੁਰਖ ਤੋਂ ਸਾਰੀ ਗੱਲ ਸਮਝ ਬਾਣਾ ਸਾਡੇ ਵਾਲਾ ਪੰਨਾ ਅੱਛਾ ਜੀ ਉਹਨਾਂ ਹੁਣਾਂ ਕਰਤਾ ਬਾੜੀ ਸਾਡੇ ਵਾਲਾ ਤਾਂ ਆ ਬਾਕੀ ਤੁਹਾਡੇ ਵਾਲੀ ਗੱਲ ਅਸੀਂ ਮੰਨਦੇ ਪਹਿਲਾਂ ਆਪਣੀ ਬਰੂਦ ਪਹਿਲਾਂ ਆਪਣੀ ਫਿਰ ਉਹ ਸ੍ਰੀ ਗੰਗਨੂ ਬਣਾ ਲਿਆ ਉਹਨਾਂ ਨੇ ਆਪਣਾ ਚੇਲਾ ਵਿਦਿਆ ਨੂੰ ਥਾਰਿਆਂ ਦਾ ਸੀ ਗੁਰੂ ਬੋਲਣ ਦਾ ਚੇਲਾ ਬਣ ਜਾ ਠੀਕ ਹੈ ਉਹੀ ਹਾਂ ਕਰਦੇ ਵਿਰੋਧੀ ਉਹ ਬਣ ਗਿਆ ਹੂੰ ਬਣਦੇ ਰਹੇ ਜੀ ਹੂੰ ਵੀ ਹਾਂ ਉੜ ਵੀ ੜਕਾ ਨਹੀਂ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਠੀਕ ਹੈ ਜੀ ਹਾਂਜੀ ਗੌਤਮ ਰਿਸ਼ੀ ਤੋਂ ਕੀ ਪਾਵੈ ਜੀ ਫਿਰ ਗੌਤਮ ਜਿਹੜਾ ਦਾ ਉਹ ਵੀ ਬ੍ਰਹਮ ਗਿਆਨੀਆਂ ਚੋਂ ਹੀ ਹੋਇਆ ਹਾਂ ਹਾਂ ਬਿਲਕੁਲ ਹੁਲਬੀ ਨੇ ਹੁਲਬੀ ਨੇ ਬ੍ਰਾਹਮਣ ਅੱਛਾ ਰਹੀਆਂ ਨੇ ਰਾਜ ਰਿਸ਼ੀ ਹੂੰ ਰਾਜੇ ਨਾਲ ਸੰਬੰਧਤ ਰਿਸ਼ੀ ਨੇ ਕੋਈ ਰਾਜ ਰਿਸ਼ੀ ਕਹਿੰਦੇ ਜਿਹੜੇ ਰਾਜਾਂ ਦੇ ਜਿਵੇਂ ਸਵਾਗਤ ਹੈ ਹੂੰ ਵਿਸ਼ੇਸ਼ ਇਹਦਾ ਰਾਮਚੰਦਾ ਗੁਰੂ ਹੈ ਜੀ ਹਾਂਜੀ ਹਾਂਜੀ ਸਰਵਾਸਤ੍ਰ ਸਦਾ ਗੁਰੂ ਹੈ ਜੀ ਹੂੰ ਹੋ ਰਾਜਾ ਨਾ ਖੜੇ ਨੇ ਠੀਕ ਹੈ ਜੀ ਇੱਕ ਸ਼ਿਵ ਸ਼ਿਵ ਹੀ ਆਲਾ ਕਸ਼ਮੀਰ ਰਾਜਾਦਾਨ ਹੀ ਵੀ ਖੜਾ ਰਾਜਾ ਤਾਂ ਕੋਈ ਨਹੀਂ ਅੱਛਾ ਹਾਂਜੀ ਗੋਤਮ ਰਿਖ ਜਸ ਗਾਇਓ ਕਬੀ ਕਲਸ ਸ ਨਾਨਕ ਗੋਇਕ ਵਿਚਾਰੇ ਉਹ ਇਹਨਾਂ ਨੂੰ ਕਹਿੰਦੇ ਦੇਵ ਰਿਸ਼ੀ ਅੱਛਾ ਜੀ ਛਿਪਟੀ ਵਾਲਿਆਂ ਨੂੰ ਅੱਛਾ ਜੀ ਰਾਜ ਰਿਸ਼ੀ ਦੇਵ ਰਿਸ਼ੀ ਇਹਨਾਂ ਦੋਨੋਂ ਦੇ ਵਿਚਾਲੇ ਜਿਹਨੇ ਖੜੇ ਨੂੰ ਪ੍ਰਭ ਰਿਸ਼ੀ ਅੱਛਾ ਜੀ ਪ੍ਰਭ ਰਿਸ਼ੀ ਬ੍ਰਹਮ ਗਿਆਨ ਦਾ ਪ੍ਰਚਾਰ ਕਰਨ ਵਾਲੇ ਉਹ ਦੋਨੋਂ ਨੂੰ ਵਿਦੇਸ਼ ਕਰ ਰਹੇ ਇੱਥੇ ਚੱਲੂਗਾ ਇੱਥੇ ਚੱਲਦਾ ਕਾਵਨ ਤੋਂ ਇਸਰ ਬ੍ਰਹਮਾ ਦੇਵੀ ਹਮ ਇਸਰ ਨਗਾਰ ਰਹੇ ਜੀ ਹਮ ਇੱਧਰੇ ਇੱਧਰੇ ਅਸਲ ਬੈਠੇ ਦੇਵਤਿਆਂ ਦਲ ਨਾਲ ਇਹ ਇਹ ਕੈਟਾਗਰੀਆਂ ਦੋ ਹੀ ਚਲਦੀਆਂ ਨੇ 200 ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਹਾਂ ਕੱਲ ਕਹਿੰਦਾ ਗੁਰਨਾਣ ਦਾ ਆਗਿਆ ਹੈ ਗੁਰਨਾਣ ਜੋ ਗੁਣਗਾ ਰਿਹਾ ਹੈ ਉਹ ਨਿਤ ਨਵੇਂ ਤਰੀਕੇ ਨਾਲ ਗਾ ਰਿਹਾ ਹੈ ਜੱਗ ਦੇ ਉੱਤੇ ਛਾ ਗਿਆ ਉਹ ਅੱਛਾ ਜੀ ਉਹਦਾ ਗੁਣ ਹੈ ਜੱਗ ਤੇ ਆ ਛਾ ਗਿਆ ਤੇ ਨਵੇਂ ਗੱਲ ਕਰਦਾ ਨਵੇਂ ਨਵੇਂ ਗੁਣ ਕਰਦਾ ਨਵੇਂ ਤਰੀਕੇ ਨਾਲ ਗੱਲ ਕਰਦਾ ਅੱਛਾ ਜੀ ਨਾ ਬਖਿਆਨ ਕਰਦਾ ਨਿਤ ਨਵਤਾਨ ਜੱਗ ਛਾਇਓ ਛਾ ਗਿਆ ਜੱਗ ਦੇ ਉੱਤੇ ਗੁਰਮੁਖਾ ਕੀਤਾ ਦਾ ਜਸ ਦੀ ਗੁਰਨਾਮ ਨੇ ਜਸ ਕੀਤਾ ਹੈ ਨਾਨਕ ਗੁਰ ਮਤਲਬ ਜੋ ਨਾਨਕ ਗੁਰ ਨੇ ਜਸ ਕੀਤਾ ਹੈ ਗਿਆਨ ਦੇ ਆਪਣੇ ਗਿਆਨ ਦੇ ਗੁਰਨਾਮ ਨੇ ਜੋ ਗੁਰਨਾਮ ਨੇ ਜੋ ਪਰਮੇਸ਼ਰ ਦਾ ਜਸ ਕੀਤਾ ਹੈ ਦਵੇਂ ਤਰੀਕੇ ਨਾਲ ਹਾਂਜੀ ਰੋਜ਼ ਨਵੇਂ ਤੋਂ ਨਵੀਂ ਗੱਲ ਕਹੀ ਹੈ ਉਹ जग ਦੇ ਉਹ ਉਹਦੀ ਆਸ਼ਾ ਛੁਪਦੀ ਹੈ ਦੇ ਤੇ ਆਸ਼ਾ ਵੀ ਵਾਹ ਵਾਹ ਵਾਹ ਜੀ ਗੁਣ ਗੁਣ ਗਾਵੈ ਭਗਤ ਨਗਾ ਨਗਾਦ ਪੁਇੰਗੰਮ ਨਗਾ ਆਦਿ ਪੁਇੰਗੰਮ ਅੱਛਾ ਜੀ ਗੁਰੂ ਦਾਵਤ ਪਿਆਲ ਭਗਤ ਪਿਆਲ ਨਗਾ ਆਦਿ ਪੁਇੰਗੰਮ ਜੀ ਇੱਕ ਇੱਕ ਮੇਰਾ ਜਿੱਤਦਾ ਪਿਆਲ ਚ ਰਹਿਣ ਵਾਲਾ ਨਾ ਥੱਲੇ ਅੱਛਾ ਜੀ ਉੱਧਰ ਹੈ ਨਾ ਉੱਥੇ ਹੀ ਆ ਜਿਹੜਾ ਹੁੰਦਾ ਜਿਵੇਂ ਜਾਂ ਗਿਆ ਹੁੰਦਾ ਨਾ ਕਹਿੰਦੇ ਸ਼ਿਵਜੀ ਗਿਆ ਗਿਆ ਆਖੇ ਜੀ ਥੱਲੇ ਹੂੰ ਅੱਛਾ ਜੀ ਥੱਪ ਵੀ ਥੱਲੇ ਉਹਦੇ ਨਿਕਲਦੇ ਜੀ ਵਿੱਚ ਉਦੋਂ ਪਾੜਾ ਹੁੰਦਾ ਹਾਂ ਹਾਂ ਥੱਲੇ ਹੀ ਹੁੰਦੇ ਨੇ ਅੱਛਾ ਜੀ ਇਹ ਜਿੱਤੇ ਜਿਹੜਾ ਜਦੋਂ ਮਾਨਸਲ ਬਹਿ ਕੇ ਗੱਲ ਕਰਦਾ ਇਹ ਮਨ ਮਰ ਜਾਂਦਾ ਹੈ ਇੱਕ ਵਾਰ ਨੇ ਚਿੱਤ ਹੋ ਜਾਂਦਾ ਹੈ ਆਪਣੀ ਵਰਗੀ ਛੱਡ ਦਿੰਦਾ ਹੈ ਉਹ ਉਹ ਅਵਸਥਾ ਹੈ ਗੁਰਗਾਬ ਹੈ ਕਿਆਲ ਭਰਤ ਨਾਗਾਦ ਪੁਯੰਗਮ ਹਿਰਦੇ ਜਿੱਤੇ ਗਿਆ ਹੋਇਆ ਮੂਰਜਤ ਹੋ ਕੇ ਜਿਹੜੇ ਗੁਣਗਾਇਆ ਇਹਦੇ ਜਿੰਨਾ ਵੀ ਗੁਣ ਗਾਇਆ ਸਾਰਿਆਂ ਨੇ ਹਿਰਦੇ ਜਿੱਤੇ ਕੇ ਮੇਰੇ ਹਿਰਦੇ ਵਸਾ ਹਿਰਦੇ ਚ ਵਸਣ ਵਾਲਾ ਭਗਤ ਹੈ ਮਨ ਛਾਪੋ ਜਾ ਨਾਲ ਜੁੜ ਕੇ ਦੋਏ ਗੁਣ ਗੋਲ ਜੀ ਆਲ ਭਗਤ ਨਾਦ ਹੂੰ ਪੁਯੰਗਮ ਉਹਨੇ ਪਹਿਲਾਂ ਅਪਾਣ ਆੜੀ ਦੀ ਗੱਲ ਕਰੂਗਾ ਇੱਥੇ। ਕੋਈ ਅੰਗਮ ਦਾਇਨ ਨੇ ਅਰਥ ਕੀਤਾ ਜੀ ਸੱਪ ਲਿਖਿਆ ਸੱਪ ਪਤਾਲ ਵਿੱਚ ਹਾਂ ਸੱਪ ਹੋਰ ਸਰਪ ਭਗਤ ਗੁਰੂ ਨਾਨਕ ਦੇ ਗੁਣ ਗਾ ਰਹੇ ਹਨ। ਗੁਰੂ ਨਾਨਕ ਦੇ ਦੀ ਜੁਬ ਵਿੱਚ ਭਗਤੀ ਨਹੀਂ ਹੋ ਸਕਦੀ। ਹਾਂਜੀ। ਚਾਹੇ ਸ਼ੇਸ਼ਨਾਗ ਹੀ ਹੋਵੇ। ਹਾਂਜੀ ਸਭ ਸਭ ਦੀ ਜੋਤ ਭਗਤੀ ਨਹੀਂ ਹੋ ਸਕਦੀ ਸਿਰਫ ਹਾਂਜੀ ਦੀ ਜੋਤ ਦੀ ਹੈ ਇਹ ਤਾਂ ਗੁਰਬਾਣੀ ਬਿਲਦੀ ਹੈ ਤਾਂ ਸਾਰੇ ਗੁਰਦਵੰਤਾਂ ਦੇ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਅਮਾਰੇ ਤਾਂ ਬਾਦ ਫਿਰ ਕਹਿੰਦੇ ਮਾਦੇਵੂ ਦਾ ਪਿਆਰ ਜਿ ਕਿਹਾ ਦੀ ਇਹਨਾਂ ਨੇ ਉਹ ਜਿਹੜਾ ਇਹਨਾਂ ਨੇ ਕਿਹਾ ਵੀ ਸ਼ਿਵ ਜੀ ਥੱਲੇ ਚਲਾ ਗਿਆ ਉਹਦੀ ਗੱਲ ਪਹਿਲਾਂ ਦੱਸਤੀ ਹੂੰ ਹੂੰ ਉਹ ਯੋ ਮਾਨਾਰਜ ਜਿੱਤ ਥੱਲੇ ਨੇ ਦੋਏ ਉਹਨੂੰ ਕਿਹਾ ਥੱਲੇ ਚਲਾ ਗਿਆ ਹੂੰ ਰਾਜਾ ਉਹ ਹੈ ਉਹ ਉੱਥੇ ਜਾ ਰਿਹਾ ਹੈ ਅਬ ਆਹਦੇ ਵੀ ਸ਼ਿਵ ਜਿਹੜਾ ਬਾਹਲਾ ਤੁਸੀਂ ਕਹਿੰਦੇ ਮਹਾਦੇਵ ਕੋ ਕਹਿੰਦੇ ਸਦਾ ਸ਼ਿਵ ਇਹ ਮਹਾਦੇਵ ਨੂੰ ਸਦਾ ਸ਼ਿਵ ਕਹਿਣ ਲੱਗੇ ਹੂੰ ਮਹਾਦੇਵ ਦਾ ਗੋਣ ਰਵੈ ਮਹਾਦੇਵ ਗੁੰਨ ਰਵੈ ਸਦਾ ਜੋਗੀ ਜਥੀ ਸੰਗਮ ਜੰਗਮ ਉਹ ਜੋਗੀ ਜਥੀ ਉਹ ਕੀ ਕਹਿਜੋ ਉਹਨਾਂ ਦਾ ਜੋ ਕਰਦਾ ਮਤ ਜੀ ਜੋ ਸਾਧਨਾ ਕਰਦਾ ਔਰ ਜੱਤ ਯਤ ਰੱਖਦਾ ਜੱਤ ਅੱਛਾ ਜੀ ਯਤ ਰੱਖਣੋ ਹੀ ਹੈਗਾ ਜੋਗੀਆਂ ਦਾ ਵਿਆਹ ਵੀ ਯਾਤਰਾ ਖੜਾ ਇਹ ਇਹਦਾ ਕੋਲ ਨਹੀਂ ਬਸ ਹੋਰ ਕੋਲ ਕੋਈ ਨਹੀਂ ਹੁੰਦਾ ਜਖ ਜੰਗਮ ਤੋਂ ਕੀ ਭਾਬਾ ਜੀ ਕਹਿੰਦਾ ਬਤਾ ਅਸਲ ਦੇ ਵਿੱਚ ਜਿਹੜਾ ਛਪਾਂ ਦੇ ਕਹਿੰਦੇ ਛੇ ਭੇਖਾਂ ਵਿੱਚੋਂ ਇੱਕ ਭੇਖ ਲਿਖਿਆ ਇੱਥੇ ਸ਼ਿਵਜੀ ਰਾਜ ਜਿਹੜੇ ਜੰਗਮ ਨੇ ਜੰਗਮ ਜਿਹੜੇ ਹੁੰਦੇ ਨੇ ਉਹ ਟੋਟਲੀਆਂ ਹੁੰਦੇ ਹਨ ਠੀਕ ਹੈ ਉਹੀ ਹੈ ਜੀ ਉਹ ਛੇ ਭਗਤਾਂ ਨੂੰ ਜੰਗਮ ਕਹਿੰਦੇ ਅੱਛਾ ਆਪ ਸ਼ਿਵ ਦੇ ਜਿਹੜੇ ਦੇ ਦੇ ਉਹਨਾਂ ਦੇ ਜਿਹੜੇ ਚੇਲੇ ਨੇ ਜੰਗ ਲੜੀ ਅੱਛਾ ਠੀਕ ਸ਼ਿਵ ਜਿਹੜੇ ਨੇ ਹੂੰ ਗੁਰੂ ਦੇ ਸੰਗਤ ਦੇ ਸਿੱਖਿਆ ਦੇ ਨਾਲ ਸਹਿਮਤ ਜਿਹੜੇ ਲੋਕ ਨੇ ਸਿੱਖਦੇ ਹੂੰ ਜਿਹੜੇ ਧਾਰਨ ਕਰ ਲੈ ਨੇ ਖੋਜੀ ਨੇ ਬਤਲਵਾ ਉਹ ਤੇ ਕਿਹਾ ਜਿਹੜੇ ਲੈ ਕੇ ਹੋ ਗਏ ਉਹ ਗੁਰਮਖਿ ਨੇ ਉਹ ਗੁਰਮਖਿ ਨੇ ਠੀਕ ਹੈ ਜਿਹੜੇ ਗੁਰਨਾਥ ਦੀ ਗੱਲ ਨੂੰ ਮੰਨ ਕੇ ਬਦਲ ਲੈਨੇ ਉਹ ਗੁਰਮਖ ਨੇ ਜਿਹੜੇ ਵੇਚੇ ਹੀ ਮਹਾਦੇਵ ਗੁਣ ਰਵੇ ਜੋਗੀ ਆਹ ਸਦਾ ਜੋਗੀ ਹੈ ਉਹ ਜੋ ਜੋਗ ਦੇ ਵਿੱਚ ਸਦਾ ਮਤਲਬਾ ਰਹਿੰਦਾ ਗੁਣ ਧਾਰਨ ਕਰ ਰਿਹਾ ਵੀ ਸਦਾ ਜੁੜਿਆ ਰਹਾ ਅੱਛਾ ਜੀ ਤੇ ਜਤ ਜਤੀ ਜੰਗਮ ਤੇ ਜਤੀਏ ਜਤੀ ਰੰਦ ਅੱਛਾ ਤੇ ਆਪਣੇ ਜਿਹੜੇ ਜੰਗਮ ਐ ਉਹ ਵੀ ਇਸੇ ਗੱਲ ਨੂੰ ਗਾ ਰਹੇ ਆ ਫੇਰ ਹਾਂਜੀ ਉਹ ਤਾਂ ਜੱਪ ਵੀ ਉਹਦੇ ਨਾਲ ਜੋਗੀ ਜੱਤੀ ਜੋਗੀ ਕੋ ਦੋ ਦੋ ਨਹੀਂ ਦੋ ਫਿਰਕੇ ਬਣਾਏ ਨੇ ਹੂੰ ਜੰਗਮ ਨੇ ਉਹ ਕ੍ਰਿਸ਼ਤੀ ਨੇ ਜਿਹੜੇ ਜੋਗੀ ਦੇ ਯੋਗੀ ਨੇ ਉਹ ਸ਼ਿਵ ਜੀ ਦੇ ਚੇਲੇ ਦੇ ਫਿਰ ਉਹ ਕਹਿੰਦੇ ਠੀਕ ਹੈ ਜੀ ਯੋਗੀ ਨੇ ਉਹ ਗੁਰਮਖ ਨੇ ਜਿਵੇਂ ਸਾਡੇ ਗੁਰਮਖ ਮੈਂ ਲਫ਼ਜ਼ ਵਰਤਿਆ ਠੀਕ ਹੈ ਉਹ ਪੂਜਣ ਨੇ ਜਗਤ ਦੇ ਚੇਲੇ ਦੇ ਉਹਦੇ ਦੇ ਕੋ ਨਾਲ ਦੀ ਸੇਵਾ ਕਰਨ ਦੇ ਠੀਕ ਹੈ ਜੀ ਗੁਣ ਗਾਵੈ ਮੁਨੀ ਵਿਆਸ ਜਿਨ ਬੇਦ ਵਿਆਕਰਣ ਵਿਚਾਰੀ ਆ ਆ ਦੇਖੋ ਵਿਆਕਰਣ ਨਾਲ ਹੋ ਜਾ ਗਏ ਹਾਂ ਹਾਂਜੀ ਵਿਆਕਰਣ ਕੱਲੀ ਨਹੀਂ ਆਈ ਹੈ ਗੁਰਬਾਣੀ ਦੇ ਵਿਆਕਰਣ ਲਾਗੂ ਇਹਦੀ ਹੋ ਸਕਦੀ ਪਹਿਲੀ ਗੱਲ ਕਪਤਾ ਤੇ ਕੋਈ ਵਿਆਕਰਣ ਲਾਗੂ ਇਹਦੀ ਹੁੰਦੀ ਹੁੰਦੀ ਹੂੰ ਹੂੰ ਕਪਤਾ ਬਾਹਰ ਹੁੰਦੀ ਹੈ ਠੀਕ ਹੈ ਜੀ 'ਚ ਲਫਜ਼ਾਂ ਨੂੰ ਨਵੇਂ ਰੂਪ ਦੇ ਦੇਣਾ ਤੋੜ-ਪਰੋੜ ਲੈਣਾ ਕਰ ਲੈਣਾ ਕੋਈ ਅੱਗੇ ਪਿੱਛੇ ਲਾ ਦੇਣਾ ਦੇ ਦੀਪਕ ਲਾ ਦੇਣਾ ਉਹ ਕਪਤਾ 'ਚ ਬਹੁਤ ਕੁਝ ਕਰਨਾ ਪੈਂਦਾ ਠੀਕ ਹੈ ਕੱਪਾ ਪੁੱਜਣ ਵਾਲੀ ਚੀਜ਼ ਹੈ ਅੰਦਾਜ਼ੇ ਨਾਲ ਕਰਨਾ ਪੈਂਦਾ ਹੂੰ ਹੂੰ ਗੁਰਨਗਾਵੈ ਬੁੱਧੀ ਬਿਆਸ ਬੁੱਧੀ ਬਿਆਸ ਦੇ ਵੀ ਗੁਰਗਾਇਏ ਨੇ ਹੂੰ ਹੂੰ ਜਿਨ ਬੇਦਰਨ ਬੇਦ ਬਿਆਕਰ ਦੀ ਵਿਚਾਰੀ ਹੈ ਉਹਨੇ ਬੇਦ ਪਿਆ ਕਰਨ ਵਿਚਾਰੀ ਹੈ ਬੇਦ ਦੀ ਬਿਆ ਕਰਨ ਵਿਚਾਰੀ ਹੈ ਗੁਰਬੰਣੀ ਬਿਆ ਕਰਨ ਦਾ ਗੱਲ ਹੈ ਬਿਆ ਕਰਨ ਦਾ ਗੱਲ ਹੈ ਗੁਰਬਾਣੀ ਦੀ ਵਿਆਕਰਣ ਗੁਰਬਾਣੀ ਦੀ ਭਾਸ਼ਾ ਗੁਰਮੁਖੀ ਭਾਸ਼ਾ ਹੈ ਗੁਰਮੁਖੀ ਭਾਸ਼ਾ ਦੀ ਵਿਆਕਰਣ ਹੋਰ ਗੱਲ ਹੈ ਵਿਆਕਰਣ ਸਾਡੀ ਭਾਸ਼ਾ ਬੰਦੂਖਾ ਦੀ ਭਾਸ਼ਾ ਦੀ ਵਿਆਕਰਣ ਹੋਰ ਗੱਲ ਮਾਤਾ 베ਰਾ ਮਾਤਾ ਜਿਹੜਾ ਲਫ਼ਜ਼ ਆਇਆ ਮਾਤਾ ਨੂੰ 베ਰਾ ਲਫ਼ਜ਼ ਆ ਗਿਆ ਵਿਆਕਰਣ ਸੰਸਾਰ ਨਹੀਂ ਆ ਸਕਦਾ ਠੀਕ ਹੈ ਸਾਡੀ ਵਿਆਕਰਣ ਸੰਸਾਰ ਦੀ ਆਸਦਾ ਹੂੰ ਇਹੜੇ ਇਹ ਪਾਵਨ ਅਰਥ ਦੇ ਜਿਵੇਂ ਹੋਂਤ ਹੋਂ ਹੈ ਹੋਂ ਹੈ ਪਰਮ ਹੈ ਇਹ ਪੁੱਲੇ ਤੋਂ ਵੀ ਆ ਜਾਂਦਾ ਏਸੀ ਵੀ ਦੁਬਿਜਾ ਜਾਂਦਾ ਕਿਉਂਕਿ ਉਹਦਾ ਕੋਈ ਵਜੂਦ ਤਾਂ ਹੈ ਨਹੀਂ ਲੇਕਿਨ ਪਹਿਤਾ ਹੈ ਨਹੀਂ ਪਰਮ ਦੇ ਵਿੱਚ ਕੋਈ ਹਾਂ ਹੋਂ ਕੋਈ ਸਰੀਰਤਾ ਹੈ ਨਹੀਂ ਇਹਨਾਂ ਦੇ ਨਾਲ ਮਾਨਾ ਜਿਹੜਾ ਇਹਦੇ ਵਾਸਤੇ ਪੁੱਲ ਵੀ ਆ ਜਾਂਦੇ ਏਸੀ ਲਈ ਕੋਈ ਲੱਭਦਾ ਜਾਂਦਾ ਜੋ ਬੁੱਧੀ ਹੋਈ ਚੀਜ਼ ਆ ਮਨ ਵੀ ਉਸਨੂੰ ਕਿਹਾ ਬੁੱਧੀ ਵੀ ਉਸਨੂੰ ਕਿਹਾ ਹੈ ਜੋਤ ਵਿੱਚ ਲਿੰਗ ਭੇਦ ਨਹੀਂ ਦੀ ਭਾਸ਼ਾ ਜਾਂਤ ਨਾਲ ਜੁੜੀ ਖੜੀ ਹੈ ਸਰੀਰ ਨਾਲ ਆਤਮਾ ਨਾਲ ਜੁੜੀ ਹੋਈ ਹੈ ਇੱਥੇ ਬੇਜਵਾਨ ਕਰਨ ਆਉਗੀ ਬਿਆਕਰ ਨਹੀਂ ਹੋ ਸਕਦੀ ਬੇਜਵਾਨ ਨਾਲ ਗਿਆਨ ਤੋਂ ਭੀ ਗਿਆਨ ਦੇ ਬਿਆਕਰ ਗਿਆਨ ਦੇ ਨਾਲ ਫੈਸਲਾ ਕਰਨ ਵੇ ਮੇਰੀ ਮਾਤਾ ਨਹੀਂ ਆ ਸਕਦਾ ਮੇਰਾ ਮਾਤਾ ਵੀ ਉਹ ਵੇਰਾ ਪਿਤਾ ਤੇ ਉਹ ਵੇਰਾ ਮਾਤਾ ਇਹਦਾ ਰੂਹ ਇੱਕ ਉਹੀ ਮਾਤਾ ਹੈ ਉਹੀ ਪਿਤਾ ਜੇ ਮੇਰੀ ਮਾਤਾ ਹੁੰਦਾ ਤਾਂ ਮਾਤਾ ਪਿਤਾ ਦੋ ਹੋ ਜਾਂਦੇ ਠੀਕ ਹੈ ਮਾਇਆ ਮਾਇਆ ਵਿੱਚ ਮਾਤਾ ਪਿਤਾ ਦੋ ਬੰਦੇ ਹੋਣੇ ਔਰਤ ਹੋਣਾ ਆਦਮੀ ਹੋਣਾ ਠੀਕ ਹੈ ਉਹ ਕਹਿੰਦੇ ਨੇ ਔਰਤਾਂ ਐ ਨਾ ਆਦਮੀ ਐ ਠੀਕ ਹੈ ਜੀ ਨਾਇਔਰਤਾ ਨਾਇਅ ਅਦਮੀ ਹੈ ਠੀਕ ਹੈ ਜੀ ਬ੍ਰਹਮਾ ਹਾਂ ਜੀ ਬ੍ਰਹਮਾ ਹਾਂ ਜੀ ਹਾਂ ਬ੍ਰਹਮਾ ਗੁਣ ਉਚਰੇ ਜਿਨ ਹੁਕਮ ਸਭ ਵਿਸ਼ਟ ਸਵਾਰੀਓ ਬ੍ਰਹਮਾ ਗੁਣ ਕਰ ਬ੍ਰਹਮਾ ਗੁਣ ਕਰੇ ਜਿਨ ਹੁਕਮ ਵਿਸ਼ਟ ਸਵਾਰੀਓ ਬ੍ਰਹਮਾ ਗੋਣ ਚੱਲਦਾ ਕੀਦੇ ਚੱਲਦਾ ਬ੍ਰਹਮਾ ਗੋਣ ਹੂੰ ਪ੍ਰਭੂ ਗਿਆਨੀ ਵੀ ਗੋਣ ਚਾਲ ਵਿੱਚ ਚੱਲਦਾ ਹੈ ਬ੍ਰਹਮਾ ਦਾ ਅਵਤਾਰ ਹੈ ਨਾਨਕ ਹਾਂ ਉਹ ਵੀਰੂ ਦਾ ਅਵਤਾਰ ਕਹਿ ਰਹੇ ਹੂੰ ਹਾਂ ਅਵਤਾਰ ਹੈ ਜੀ ਹਾਂ ਸਾਰੇ ਭਗਤ ਪ੍ਰਭੂ ਦੇ ਅਵਤਾਰ ਨੇ ਠੀਕ ਹੈ ਜੀ ਕੋਣਾ ਕੀ ਦੇ ਜਾਣ ਕਰਦੇ ਨੇ ਜੀ ਦੇ ਹੁਕਮ ਬੰਦ ਨੇ ਸਾਰੀ ਸ੍ਰਿਸ਼ਟੀ ਸਵਾਰੀ ਹੈ ਠੀਕ ਹੈ ਜੀ ਜਿਹੜੇ ਹੁਕਮ ਦੇ ਸਾਰੀ ਸ੍ਰਿਸ਼ਟੀ ਸਵਾਰੀਆ ਹੁਕਮ ਦੇ ਗੁਰਦੇ ਹੈ ਹਾਂ ਹਾਂ ਹਾਂਜੀ ਇਹ ਹੁਕਮ ਦੇ ਗੁਰਦੇ ਸਾਰੇ ਹੁਕਮ ਆ ਹਕਮ ਦੋਰੇ ਕੋਈ ਨਹੀਂ ਹੁਕਮ ਆਰੇ ਹਕਮ ਜਿੱਤੇ ਫਰਕ ਨਹੀਂ ਹੁਕਮ ਦੇ ਗੁਰ ਕਹਿ ਲੋ ਚਾਹ ਹਕਮ ਦੇ ਕਹਿ ਲੋ ਗੱਲ ਇੱਕ ਹੀ ਹੈ ਠੀਕ ਹੈ ਜੀ ਨਾਲੇ ਉਹ ਸਿਆ ਸਿਆਰੀ ਲੱਗਿਆ ਜੀ ਜਿਨੀ ਹੁਕਮ ਵਿੱਚ ਸਭ ਸ੍ਰਿਸ਼ਟੀ ਸਵਾਰੀ ਠੀਕ ਹੈ ਜੀ ਇਹ ਆ ਕੰਮ ਹੋ ਰਹੀ ਹਾਂਜੀ ਹੁਕਮ ਸਾਰੀ ਬੜੀ ਆ ਉਹਦੇ ਕੋਲੋਂ ਨਿਕਲਦਾ ਹਾਂਜੀ ਹਰ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਬ੍ਰਹਮ ਖੰਡ ਬ੍ਰਹਮੰਡ ਖੰਡ ਬ੍ਰਹਮ ਖੰਡ ਦੇਖੋ ਬ੍ਰਹਮ ਹਉ। ਹੂੰ ਹੂੰ। ਬ੍ਰਹਮ ਰੂਪ ਜਿਹੜਾ ਅੰਡ ਸੀ, ਬੀਜ ਰੂਪ ਸੀ ਬ੍ਰਹਮ। ਹੂੰ ਹੂੰ। ਖੰਡ ਗਿਆ ਉਹਦਾ ਟੁਕੜਾ ਛਾਲ। ਹੂੰ ਹੂੰ। ਖੰਡ ਹੋ ਗਏ ਨਾ ਦੋ, ਠੀਕ ਹੈ ਜੀ। ਬ੍ਰਹਮ ਅੰਡ ਦਾ ਖੰਡ ਗਿਆ, ਖੰਡਾ ਉਹਦਾ ਮੰਨ ਖੱਡਣ ਹੋਇਆ ਹੋਇਆ, ਠੀਕ ਹੈ ਜੀ। ਅੰਗ ਹੋਇਆ ਹੋਇਆ ਨਾ, ਠੀਕ ਹੈ ਜੀ, ਠੀਕ ਹੈ ਹਾਂ ਪੂਰਨ ਬ੍ਰਹਮ। ਜਦ ਖੰਡ ਨਾਲ ਮਿਲ ਗਿਆ ਬੋਲ ਪ੍ਰਭ ਹੋ ਗਿਆ ਹੂੰ ਬ੍ਰਹਮ ਅੰਡ ਬ੍ਰਹਮ ਅੰਡ ਖੰਡ ਹੂੰ ਪ੍ਰਭ ਹੂੰ ਪੂਰਨ ਬ੍ਰਹਮ ਆਪੋਲ ਪ੍ਰਭ ਹੋ ਗਿਆ ਹੂੰ ਹੂੰ ਜਿਤ ਤਰ ਮਨ ਹੋ ਕੇ ਖੰਡ ਤਦ ਇਹ ਹਣ ਬ੍ਰਹਮ ਅੰਡ ਹੋ ਗਿਆ ਜਦ ਖੰਡ ਤੁਸੀਂ ਪਹਿਲਾਂ ਜਿਹੜਾ ਪਹਿਲਾ ਖੰਡ ਸੀ ਉਹ ਬੀਜ ਰੂਪ ਉਹ ਬਿਆਨ ਪੂਰਾ ਹੋ ਗਿਆ ਹੂੰ ਹੂੰ ਪੂਰਨ ਬ੍ਰਹਮ ਬਣ ਗਿਆ ਰਿਹਾ ਜਿਹੜਾ ਖੰਡ ਸੀ ਪੂਰਨ ਬ੍ਰਹਮ ਹੋ ਗਿਆ ਪੂਰਾ ਹੋ ਗਿਆ ਖੰਡ ਨਹੀਂ ਰਿਹਾ ਟੁਕੜਾ ਨਹੀਂ ਰਿਹਾ ਠੀਕ ਹੈ ਜੀ ਜਿਹੜੀ ਕਾਣ ਸੀ ਜਿਹੜੀ ਕਾਣ ਸੀ ਪੂਰੀ ਹੋ ਗਈ ਜੋ ਜਿੱਥੇ ਸੀ ਪਰਮ ਨਹੀਂ ਰਿਹਾ ਉਹ ਠੀਕ ਹੈ ਜੀ ਗੁਣ ਨਿਰਗੁਣ ਸਮ ਜਾਣਿਓ ਗੋਲਰ ਅਤੇ ਮਿਰਗੋਲ ਬਰਾਬਰ ਹੋ ਗਿਆ ਮਿਰਗੋਲ ਕੌਲ ਸੀ ਮਿਰਗੋਲ ਬਣ ਸੀ ਗੋਲ ਸੀ ਜੀ ਗੋਲ ਰੂਪ ਚਿਤ ਸੀ ਗੋਲ ਗੋਲਰ ਮਿਰਗੋਲ ਬਰਾਬਰ ਹੋ ਗਿਆ ਕੌਣ ਦੀ ਜੋ ਕਮੀ ਸੀ ਉਹ ਵੀ ਦੂਰ ਹੋ ਕਰਕੇ ਕਮੀ ਸੀ ਮਿਰਗੋਲ ਸੀ ਬਨਰ ਬਨ ਵੀ ਸਰਗੋਲ ਤੇ ਨਾਲ ਹੋ ਗਿਆ ਹੂੰ ਗੋਲ ਮਿਰਗੋਲ ਦਾ ਜਾਨਿਓ ਨੂੰ ਕੋਈ ਰੂਪ ਜਾਨਿਓ ਅਸਲ ਜੇ ਕੋਈ ਆ ਦੋ ਪੈਸੋਲ ਕੋਈ ਹੀ ਮਲਾਕਾਰ ਜੇ ਤੁਸਗਲੀ ਬੋਹੀ ਠੀਕ ਹੈ ਉਹ ਭਰ ਮੇਰ ਦੀ ਆ ਵੀ ਹੋਈ ਆ ਫਰਕ ਕੁਛ ਨਹੀਂ ਹੈ ਫਰਕ ਗਿਆਨ ਉਹਨਾਂ ਗਲਤ ਦਾ